ਸਾਹਿਬ ਨੂੰ ਸਤਿਕਾਰਯੋਗ ਸਾਧ ਸੰਗਤ ਜੀ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਪ ਜੀ ਨੇ 71 ਹੋ ਕੇ ਨਾਮ ਸਿਮਰਨ ਕੀਤਾ ਹੈ ਸਤਗੁਰੂ ਜੀ ਦੇ ਪਵਿੱਤਰ ਦਰਸ਼ਨ ਕੀਤੇ ਨੇ ਹੁਣੇ-ਹੁਣੇ ਆਪ ਜੀ ਨੇ ਰਾਗੀ ਜਥੇ ਕੋਲੋਂ ਕੀਰਤਨ ਸਰਵਣ ਕੀਤਾ ਹੈ संसार मंडल ਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਗੁਰੂ ਕੀ ਸਿੱਖਿਆ ਮਹਾਨ ਮੰਨੀ ਗਈ ਹੈ। ਔਰ ਅਸੀਂ ਹਰ ਰੋਜ਼ ਸਰਵਣ ਕਰਨੇ ਆ। ਨਿਤਨੇਮ ਦੇ ਵਿੱਚ ਆਪਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਸਰਵਣ ਕੀਤੇ ਨੇ ਜਿਹੜੇ ਕਿ ਰਿਕਾਰਡ ਹੋਏ ਹੋਏ ਨੇ। ਔਰ 40 ਸਾਲ ਹੋ ਗਏ ਨੇ ਹਰ ਰੋਜ਼ ਸੁਣੇ ਜਾਂਦੇ ਨੇ ਪੂਰੇ 40 हो ਹੋ ਗਏ ਹੋ ਸਕਦਾ समय ਦੇ कोई दिन ऐसा ਦਿਨ ਐਸਾ ਹੋਵੇ ਕਿ ਜਿਸ ਦਿਨ ਉਹ ਉਪਦੇਸ਼ ਨਹੀਂ ਸਣ ਕਰਦੇ ਕਥਾ ਨਹੀਂ ਸਣ ਕਰਦੇ ਪਰ 40 ਸਾਲ ਤੋਂ ਲੈ ਕੇ ਅੱਜ ਤੱਕ ਹਰ रोज ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਉਪਦੇਸ਼ ਰਿਕਾਰਡ होया ਹੋਇਆ ਅਸੀਂ करने ਕਰਨੇ ਆ। ਲਗਾਤਾਰ ਪ੍ਰਵਾਹ ਚੱਲ ਰਿਹਾ ਹੈ। ਪਰ ਜਿੰਨਾ ਚਿਰ ਉਹ ਹਿਰਦੇ 'ਚ ਨਾ ਵਸੇ। ਉਹਨਾਂ ਚਿਰ नहीं करता अंदर, काट नहीं करता, ਅੰਦਰ। ਕਾਟ ਨਹੀਂ ਕਬੀਰ ਇੱਕ ਸ਼ਲੋਕ ਲਿਖਦੇ ਨੇ ਕਬੀਰ ਕਹਿੰਦੇ ਨੇ ਗੁਰ ਲਾਗਾ ਤਬ ਜਾਣੀ ਐ ਮਿਟੇ ਮੋਹ ਤਨ ਤਾਪ ਹਰਖ ਸੋਗ ਦਜ ਦਜੈ ਨਹੀਂ ਤਬ ਹਰ ਆਪੇ ਆਪ ਅਸੀਂ ਸਾਰੇ ਸਤਿਗੁਰੂ ਵਾਲੇ ਬੈਠੇ ਆਂ ਸਾਰੇ ਗੁਰੂ ਵਾਲੇ ਬੈਠੇ ਆਂ ਅਸੀਂ ਪਰ ਇਹਦੀ ਵੀ ਕੋਈ ਨਿਸ਼ਾਨੀ ਐ ਮਿਲਣ ਦੀ ਸਤਿਗੁਰੂ ਵਾਲਿਆਂ ਦੀ ਵੀ ਕੋਈ ਨਿਸ਼ਾਨੀ ਐ ਕਬੀਰ ਕਹਿੰਦੇ ਨੇ ਸਮਝ ਲਾਓ ਤਾਂ ਸਾਡਾ குரு ਨਾਲ ਮਿਲਾਪ ਹੋਇਆ ਹਰਖ ਸ਼ੋਗ ਇਹਦਾ ਭਾਵ ਹੈ ਖੁਸ਼ੀ ਤੇ ਗਮੀ ਖੁਸ਼ੀ ਤੇ ਗਮੀ ਦੀ ਅੱਗ ਵਿੱਚ ਨਾ ਸੜੇ ਇਹ ਵੀ ਇੱਕ ਅਗਨੀ ਹੈ ਸੰਸਾਰ ਵਿੱਚ ਕਈ ਪ੍ਰਕਾਰ ਦੀਆਂ ਅਗਨੀਆਂ ਨੇ ਚਾਰ ਅਗਨੀਆਂ ਬਹੁਤ ਮਸ਼ਹੂਰ ਨੇ ਤੇ ਸਾਡੇ ਅੰਦਰ ਚਾਰ ਕਿਸਮ ਦੀ ਅੱਗ ਕੰਮ ਕਰਦੀ ਹੈ ਇੱਕ ਹੈ ਦਾਵਾ ਅਗਨ ਐ ਮੇਰਾ ਹੈ ਐ ਮੇਰਾ ਹੈ ਉਹ ਵੀ ਮੇਰਾ ਹੈ ਉਹ ਮੇਰਾ ਹੈ ਜੇ ਕੋਈ ਅੱਗੇ ਦੂਸਰਾ ਮੇਰਾ ਆਖਣ ਵਾਲਾ ਕਹ ਦੇ ਤੇ ਲੜਾਈ ਹੋ ਜਾਂਦੀ ਆ ਮੁਕਦਮਾ ਚੱਲ ਪੈਂਦਾ ਇਹਨਾਂ ਦਾਵਾ ਅਗਨ ਦਾਵਾ ਅਗਨ ਬਹੁਤ ਤਿਰਨ ਜਾਲੇ ਕੋਈ ਹਰਿਆ ਬੂਟ ਰਿਓਰੀ ਇਸ ਦਾਵਾ ਅਗਨ ਜਿਹੜੀ ਆ ਬਿਰਸ਼ਾਂ ਵਿੱਚ ਵੀ ਪਾਈ ਜਾਂਦੀ ਆ ਜਦੋਂ ਤੇਜ਼ ਹਵਾਵਾਂ ਚੱਲਦੀਆਂ ਤੇ ਆਪੋ ਵਿੱਚ ਖਹਿ ਕੇ ਬਿਰਸ਼ਾ ਨੂੰ ਅੱਗ ਲੱਗ ਜਾਂਦੀ ਹੈ ਬਣਾਂ ਦੇ ਬਣ ਸੜ ਜਾਂਦੇ ਨੇ ਸਾਰੇ ਆਪਣੇ ਆਪ ਹੀ ਦਾਵਾ ਅਗਨ ਇਹ ਹੈ ਇਹਦਾ ਨਾਮ ਹੈ ਦਾਵਾ ਅਗਨ ਦੂਸਰਾ ਹੈ ਬੜਵਾ ਅਗਨ ਜਿਹੜਾ ਸਾਡੇ ਸਰੀਰ ਦਾ ਪੰਜਵਾਂ ਤੱਤ ਹੈ ਤੇ ਸਰੀਰ ਦੀ ਜਿਹੜਾ ਤਾਪਮਾਨ ਹੈ ਉਹਨੂੰ ਬਰਾਬਰ ਰੱਖਦੀ ਹੈ ਜੇ ਵੱਧ ਘੱਟ ਜਾਏ ਤਾਂ ਸਰੀਰ ਬਿਮਾਰ ਹੋ ਜਾਂਦਾ ਇਹਦਾ ਨਾਮ ਬੜਵਾ ਅਗਨ ਤੀਸਰਾ ਹੈ ਜਠਰਾ ਅਗਨ ਜਠਰਾ ਅਗਨ ਕਹਿੰਦੇ ਨੇ ਪਾਚਨ ਸ਼ਕਤੀ ਨੂੰ ਜਿਹੜੀ ਅਗਨੀ ਜਿਸ ਜਿਹੜੀ ਗਰਮੀ ਸਾਡਾ ਭੋਜਨ ਪਚਾਉਂਦੀ ਹੈ ਉਹਦਾ ਨਾਮ ਹੈ ਜਠਰਾ ਅਗਨ ਇਸੇ ਗਰਮੀ ਦੀ ਹੀਟ ਤੋਂ ਮਨੁੱਖ ਦਾ ਸਰੀਰ ਬੰਤਰ ਵਿੱਚ ਆਉਂਦਾ ਹੈ ਇਹਦਾ ਨਾਮ ਜਠਰਾ ਅਗਨ ਹੈ ਪੇਟ ਵਿੱਚ ਹੈ ਚੌਥੀ ਹੈ ਅਬਿੰਦਨਾ ਅਗਨੀ ਅਬਿੰਦਨਾ ਅਗਨੀ ਉਹ ਹੈ ਜਿਹੜਾ ਸਾਡੇ ਸਰੀਰ ਚੋਂ ਪਾਣੀ ਨੂੰ ਸੁਕਾ ਦਿੰਦੀ ਹੈ ਸਮੁੰਦਰ ਦਾ ਪਾਣੀ ਸੁੱਕ ਜਾਂਦਾ ਨਦੀਆਂ ਤੇ ਨਾਲਿਆਂ ਦਾ ਪਾਣੀ ਸੁੱਕ ਜਾਂਦਾ ਛੋਟੇ ਛੋਟੇ ਸਰੋਵਰਾਂ ਦਾ ਪਾਣੀ ਸੁੱਕ ਜਾਂਦਾ ਉਹ ਜਿਹੜੀ ਸ਼ਕਤੀ ਪਾਣੀ ਨੂੰ ਸੁਕਾਉਣ ਵਾਲੀ ਹੈ ਉਹਦਾ ਨਾਮ ਅਬਿੰਦਨਾ ਅਗਨੀ ਹੈ ਚਾਰ ਪ੍ਰਕਾਰ ਦੀ ਅਗਿਆ ਇੱਕ ਹੋਰ ਵੀ ਚਾਰ ਪ੍ਰਕਾਰ ਦੀ ਅਗਿਆ ਹਾ ਮੈਂ ਅਗਨੀ ਕ੍ਰਿਸ਼ਨਾ ਅਗਨੀ ਕ੍ਰੋਧ ਅਗਨੀ ਤੇ ਈਰਖਾ ਅਗਨੀ ਇਹ ਚਾਰ ਅਗਨੀਆਂ ਇਹ ਵੀ ਸਾਡੇ ਅੰਦਰ ਕੰਮ ਕਰਦੀਆਂ ਪਈਆਂ ਨੇ ਕਬੀਰ ਕਹਿੰਦੇ ਨੇ ਜਿਹੜਾ ਇਨ੍ਹਾਂ ਅਗਨੀਆਂ ਤੋਂ ਬਚ ਗਿਆ ਏ ਇਹ ਗੁਰੂ ਦਾ ਉਪਦੇਸ਼ ਸਰਵਣ ਕਰਕੇ ਤੇ ਫੇਰ ਸਮਝ ਲਓ ਕੋ ਸਮਝ ਲਓ ਕਿ ਮੈਂ ਗੁਰੂ ਨੂੰ ਮਿਲ ਪਿਆ ਤੇ ਜੇ ਇਨ੍ਹਾਂ ਅਗਨੀਆਂ ਤੋਂ ਨਹੀਂ ਬਚਾ ਹੋਇਆ ਇਹ ਸਰੀਰ ਨੂੰ ਤਪਾ ਦਿੰਦੀਆਂ ਨੇ ਸਰੀਰ ਨੂੰ ਗਰਮ ਕਰਨ ਵਾਲੀਆਂ ਨੇ ਕਰੋਧ ਗਰਮ ਕਰਦਾ ਹਾਂ ਮੈਂ ਗਰਮ ਕਰਦੀ ਹੈ ਤ੍ਰਿਸ਼ਨਾ ਗਰਮ ਕਰਦੀ ਹੈ ਸਰੀਰ ਨੂੰ ਇਹ ਸਾਰੇ ਤਨ ਤਾਪ ਕਹਿੰਦੇ ਨੇ ਗੁਰ ਲਗਾ ਤਬ ਜਾਣੀ ਹੈ ਮਿਟੇ ਮੋਹ ਤਨ ਤਾਪ ਇਹ ਅਗਨੀਆਂ ਜੜੀਆਂ ਨੇ ਸਰੀਰ ਨੂੰ ਤਪਾ ਜਾਂਦੀਆਂ ਨੇ ਗਰਮ ਕਰਦੀਆਂ ਨੇ ਤੇ ਸਰੀਰ ਦਾ ਨੁਕਸਾਨ ਹੋ ਜਾਂਦਾ ਕਬੀਰ ਕਹਿੰਦੇ ਨੇ ਜੇ ਤੇ ਇਹ ਮਿਟ ਗਿਆ ਤੁਹਾਡਾ ਸਭ ਕੁਝ ਜੇ ਤੇ ਇੱਥੇ ਆ ਗਿਆ ਮੋਹ ਤੋਂ ਉੱਚਾ ਹੋ ਗਿਆ ਮਨੁੱਖ ਇਹਨਾਂ ਅਗਨੀਆਂ ਤੋਂ ਉੱਚਾ ਹੋ ਜਾਏ ਤ੍ਰਿਸ਼ਨਾ ਤੋਂ ਹਉ ਮੈ ਤੋਂ ਈਰਖਾ ਤੋਂ ਕਰੋਧ ਅਗਨੀ ਤੋਂ ਤੇ ਸਮਝ ਲਓ ਭਈ ਗੁਰੂ ਨੂੰ ਮਿਲਿਆ ਤੇ ਜੇ ਨਹੀਂ ਹੋ ਸਕਿਆ ਜੇ ਸਾਡੇ ਅੰਦਰੋਂ ਈਰਖਾ ਨਹੀਂ ਨਿਕਲੀ ਦਵੇਤ ਨਹੀਂ ਨਿਕਲੀ ਹਉਮੈ ਨਹੀਂ ਨਿਕਲੀ ਤ੍ਰਿਸ਼ਨਾ ਨਹੀਂ ਮਿਟੀ ਤੇ ਫਿਰ ਗੁਰੂ ਮਿਲਿਆ ਨਾ ਸਮਝ ਲੈਣਾ ਫਿਰ ਆਖੇ ਇਸੇ ਤਰ੍ਹਾਂ ਆਮ ਦੁਨੀਆ ਵਿੱਚ ਅਸੀਂ ਵੀ ਤੁਰੇ ਫਿਰਨੇ ਹ ਸ਼ਰਤ ਹੈ ਨਿਸ਼ਾਨੀ ਹੈ ਹਰ ਇੱਕ ਸੋਗ ਦਾ ਜਾ ਨਹੀਂ ਜੇ ਇਹ ਸਰਵਣ ਕਰਦਿਆਂ ਵੀ ਨਾ ਅਸਰ ਹੋਵੇ ਤੇ ਫਿਰ ਇਸ ਮਨੁੱਖ ਦੀ ਉਹਨਾਂ ਮਨੁੱਖਾਂ ਦੀ ਬਾਸਮਿਰਤੀ ਮੰਨੀ ਗਈ ਹੈ ਕਿਉਂਕਿ ਬਾਸ ਅੰਦਰੋਂ ਪੋਲਾ ਹੁੰਦਾ ਹੈ ਉਹਦੇ ਅੰਦਰ ਫੂਕ ਮਾਰੀਏ ਤੇ ਠਹਿਰਦੀ ਨਹੀਂ ਅਗਲੇ ਪਾਸੇ ਨਿਕਲ ਜਾਂਦੀ ਹੈ ਜੇ ਗੁਰੂ ਉਪਦੇਸ਼ ਨਹੀਂ ਅਸਰ ਕੀਤਾ ਗੁਰੂ ਉਪਦੇਸ਼ ਹਿਰਦੇ ਵਿੱਚ ਨਹੀਂ ਵਸਿਆ ਤੇ ਫਿਰ ਇਹ ਬਾਸਮਿਰਤੀ ਵਾਲਾ ਮਨੁੱਖ ਹੈ ਇਹਦੇ ਕੰਨਾਂ ਦੇ ਵਿੱਚੋਂ ਦੀ ਗੁਰੂ ਉਪਦੇਸ਼ ਨਿਕਲ ਗਿਆ ਅੰਦਰ ਜਗ੍ਹਾ ਨਹੀਂ ਬਣਾਈ ਗੁਰੂ ਉਪਦੇਸ਼ ਨੇ ਅੰਦਰ ਵੱਸਿਆ ਦੀ ਹਿਰਦੇ ਵਿੱਚ ਮੈਂ ਅਰਜ ਕਈ ਵਾਰਾ ਕਰਨਾ ਹੁੰਦਾ ਕਿ ਕਈ ਤੇ ਮਨੁੱਖ ਐਸੇ ਦੁਨੀਆ ਵਿੱਚ ਨੇ ਜਿਨ੍ਹਾਂ ਨੇ ਪਸ਼ੂਆਂ ਤੋਂ ਜਾਨਵਰਾਂ ਤੋਂ ਪੱਥਰ ਤੋਂ ਹੋਰ ਵੀ ਕਈਆਂ ਪਦਾਰਥਾਂ ਤੋਂ ਸਿੱਖਿਆ ਲੈ ਲਈ ਹੈ ਤੇ ਕਈ ਉਹ ਨੇ ਜਿਹੜੇ ਗੁਰੂ ਸਾਹਿਬਾ ਤੋਂ ਵੀ ਸਿੱਖਿਆ ਨਹੀਂ ਲੈਂਦੇ ਸਾਡੇ ਅਰਬ ਦੇਸ਼ਾਂ ਦੇ ਵਿੱਚ ਈਰਾਨ ਦਾ ਇੱਕ ਸੂਫੀ ਸੰਤ ਹੋਇਆ ਸ਼ੇਖ ਸ਼ਾਦੀ ਨਾਮ ਹੈ ਬੜਾ ਮਸ਼ਹੂਰ ਹੈ ਇਹਨੂੰ ਦੁਨੀਆ ਜਾਣਦੀ ਹੈ ਇਹਨੂੰ ਇਹ ਕਹਿੰਦਾ ਹੈ ਇਹਨੂੰ ਪੁੱਛਿਆ ਇਹ ਕਵੀ ਵੀ ਹੈ ਤੇ ਕਥਾਕਾਰ ਵੀ ਹੈ ਇਹਨੂੰ ਪੁੱਛਿਆ ਸ਼ੇਖ ਸਾਹਿਬ ਤੁਸੀਂ ਇਹ ਗੱਲ ਦੱਸੋ ਇੰਨਾ ਵਧੀਆ ਬੋਲਣਾ ਤੇ ਲਿਖਣ ਦੀ ਤੁਸੀਂ ਜਾਚ ਕਿੱਥੋਂ ਸਿੱਖੀ ਹੈ ਉਹ ਕਹਿੰਦਾ ਇਹ ਸਿੱਖਿਆ ਮੈਂ ਅੰਨਿਆਂ ਤੋਂ ਲਈ ਹੈ ਸ਼ੇਖ ਕਹਿੰਦਾ ਅੰਦਾ ਮੈਂ ਇਹ ਸਿੱਖਿਆ ਅੰਨਿਆਂ ਕੋਲੋਂ ਲਈ ਹੈ ਹੁਣ ਅੰਨੇ ਮਨੁੱਖ ਨੂੰ ਜਿਸ ਨੂੰ ਦਿਸਦਾ ਹੀ ਕੁਛ ਨਹੀਂ ਉਹਦੇ ਤੋਂ ਕੀ ਸਿੱਖਿਆ ਲਈ ਜਾ ਸਕਦੀ नहीं, ਆਪਣੇ ਆਪ ਨੂੰ ਤੇ ਦਿਸਦਾ ਨਹੀਂ ਕਈ ਥਾਈਂ ਹੁੰਦੇ ਨੇ ਕਹਿੰਦੇ ਨੇ ਅੰਨਾ ਆਗੂ ਜੇਥੀਆ ਸਭ ਸਾਥ ਮੁਹਾਵੇ ਜੇ ਅੰਨਾ ਕੋਈ ਆਗੂ ਹੋ ਜਾਏ ਬਣਾ भी ਤੇ ਉਹ ਆਪ ਵੀ ਡਿੱਗ ਪੈਂਦਾ ਖੱਡੇ ਵਿੱਚ ਤੇ ਨਾਲ ਦਿਆਂ ਸਾਥੀਆਂ ਨੂੰ ਵੀ ਡੇਕ ਦਿੰਦਾ ਆਪ ਵੀ ਡੁੱਬ ਜਾਂਦਾ ਤੇ ਸਾਥੀ ਵੀ ਡੋਬ ਜਾਂਦਾ ਉਹਦੇ ਕੋਲ ਤੇ ਇਹ ਗੜ ਕਹਿੰਦਾ ਅੰਨ੍ਹਾ ਮਨੁੱਖ ਜਿਹੜਾ ਉਹਨੂੰ ਕੋਈ ਸੰਸਾਰ ਦੀ ਚੀਜ਼ ਰਸਤਾ ਨਹੀਂ ਦੱਸਦਾ। ਉਹਦੇ ਕੋਲ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਉਹ ਹੱਥ ਵਿੱਚ ਲਾਠੀ ਫੜ ਲੈਂਦਾ। ਛੋਟਾ ਹੱਥ ਵਿੱਚ ਹੋਵੇਗਾ। ਜਿੰਨਾ ਚਿਰ ਅੰਨ੍ਹਾ ਮਨੁੱਖ ਅਗਲੇ ਪਾਸੇ ਛੋਟੇ ਦੇ ਨਾਲ ਜਗ੍ਹਾ ਨੂੰ ਵੇਖ ਲੈਂਦਾ ਕਿ ਉੱਚਾ ਨਹੀਂ ਮਥਾਂ ਨਹੀਂ ਟਟੋਲ ਕੇ ਚੱਲੇਗਾ, ਸੰਭਲ ਕੇ ਚੱਲੇਗਾ। ਜਿੰਨਾ ਜੇ ਉਹਨੂੰ ਪਤਾ ਲੱਗ ਜਾਏ ਕਿ ਨੀਵਾ ਥਾਂ ਆ ਤੇ ਛੋਟਾ ਦੱਸ ਦੇਗਾ ਕਿ ਅੱਗੇ ਖੱਡਾ ਆ। ਅੱਗੇ ਖੂਹ ਆ ਰਿਹਾ। ਜਰਾ ਵੀ ਪੈਰ ਨਹੀਂ ਧਰਦਾ ਅੰਨਾ ਮਨੁੱਖ ਜਦੋਂ ਨੂੰ ਪਤਾ ਲੱਗ ਜਾਂਦਾ ਅੱਗੇ ਜਗਾ ਪੱਧਰੀ ਐ ਛੋਟੇ ਨਾਲ ਵੇਖ ਕੇ ਚੱਲਦਾ ਕਹਿੰਦਾ ਇਹ ਸੰਭਲ ਕੇ ਬੋਲਣ ਦੀ ਜਾਂਚ ਮੈਂ ਅੰਨਿਆਂ ਕੋਲੋਂ ਸਿੱਖੀ ਹੈ ਜਿਤਨਾ ਉਹ ਸੰਭਲ ਕੇ ਚੱਲਦਾ ਹੁਣ ਇਥੇ ਅੰਨੇ ਕੋਲੋਂ ਸਿੱਖਿਆ ਲੈ ਰਿਹਾ ਤੇ ਮੈਂ ਕਹਿੰਦਾ ਜਿਨ੍ਹਾਂ ਦੇ ਅੰਦਰ ਗੁਰੂ ਉਪਦੇਸ਼ ਨਹੀਂ ਵਸਿਆ ਉਹ ਗੁਰੂ ਉਪਦੇਸ਼ ਤੋਂ ਵਾਂਝੇ ਰਹਿ ਗਏ ਸਖਣੇ ਰਹਿ ਗਏ ਤੇ ਬਾਸ ਬਿਰਤੀ ਹੋ ਗਏ ਜਿਉ ਬਾਸ বাজਾਈਆ ਫੂਕ ਇਸ ਤਰ੍ਹਾਂ ਹੋ ਗਿਆ ਰਾਵਣ ਨੂੰ ਸਮਝਾਇਆ ਭਗਵਾਨ ਰਾਮਚੰਦਰ ਨੇ ਜਗਤਗੁਰੂ ਨੇ ਜਗਤਗੁਰੂ ਨੇ ਸਮੇ ਦੇ ਮਾਲਕ ਨੇ ਤੇ ਸਮਝਾਉਣ ਦੇ ਬੜੇ ਯਤਨ ਕੀਤੇ ਭੀਸ਼ਣ ਨੂੰ ਭੇਜਿਆ ਅੰਗਦ ਨੂੰ ਭੇਜਿਆ ਰਾਮ ਇਹਨੂੰ ਹਰੂਮਾਨ ਨੂੰ ਭੇਜਿਆ ਇਹਨਾਂ ਨੂੰ ਭੇਜਿਆ ਵੀ ਇਹਨੂੰ ਸਮਝਾਓ ਜੇ ਸਮਝ ਜਾਵੇ ਤੇ ਲੜਾਈ ਨਾ ਹੋਵੇ ਮਾਪੁਰਸ਼ਾਂ ਦੇ ਵਿਚਾਰ ਹੁੰਦੇ ਨੇ ਇਹ ਨਹੀਂ ਸਮਝਿਆ ਭਗਵਾਨ ਆਖਣ ਲੱਗੇ ਹੁਣ ਤੂੰ ਵਿਚਾਰ ਨਾਲ ਨਹੀਂ ਸਮਝਿਆ ਤਲਵਾਰ ਨਾਲ ਸਮਝੇਗਾ ਦੂਜਾ ਤਰੀਕਾ ਹੈ ਨਾ ਸਮਝਾਉਣ ਦੇ ਵੀ ਦੋ ਤਰੀਕੇ ਨੇ ਇੱਕ ਤੇ ਪਿਆਰ ਹੈ ਦੂਜਾ ਤਲਵਾਰ ਹੈ ਤੇ ਸਾਡੇ ਪੈਗੰਬਰਾਂ ਕੋਲ ਦੁਨੀਆਂ ਦੇ ਹਿੰਦੁਸਤਾਨ ਦੇ ਰਿਸ਼ੀਆ ਮੂਨੀਆਂ ਕੋਲ ਤੇ ਅਵਤਾਰੀ ਮਹਾਪੁਰਸ਼ਾਂ ਦੇ ਕੋਲ ਕੋਈ ਨਾ ਕੋਈ ਸ਼ਸਤਰ ਜ਼ਰੂਰ ਆਇਆ ਭਗਵਾਨ ਰਾਮਚੰਦ ਤਰਸ਼ਮਾਨ ਲੈ ਕੇ ਆਏ ਨੇ ਭਗਵਾਨ ਕ੍ਰਿਸ਼ਨ ਸੁਦਰਸ਼ਨ ਚੱਕਰ ਲੈ ਕੇ ਆਏ ਨੇ ਸ਼ਿਵ ਦੇ ਹੱਥ ਵਿੱਚ ਤ੍ਰਸੂਲ ਹੈ ਹਾਲਾਂਕਿ ਬੜਾ ਹੀ ਭੋਲਾ ਨਾਥ ਹੈ ਇਹਨੂੰ ਭੋਲਾ ਨਾਥ ਕਹਿੰਦੇ ਨੇ ਫਿਰ ਵੀ ਕੋਲ ਸ਼ਸਤਰ ਹੈ ਸ਼ਸਤਰਧਾਰੀ ਆਏ ਨੇ ਮੁੱਢੋ ਲੈ ਕੇ ਕਿਉਂਕਿ ਜੇ ਕੋਈ ਵਿਚਾਰ ਨਾਲ ਨਾ ਮੰਨੇ ਤਾਂ ਦੂਜਾ ਪਿਆ ਦੂਜਾ ਤਲਵਾਰ ਦੋ ਤਰੀਕੇ ਨੇ ਮਨਾਉਣ ਦੇ ਮਨੋਖ ਨੂੰ ਇਸੇ ਤਰ੍ਹਾਂ ਅੱਗੇ ਵੀ ਆਇਆ ਮੈਂ ਅਰਜ ਕਰ ਰਿਹਾ ਸਾਂ ਨਹੀਂ ਮੰਨਿਆ ਭਗਵਾਨ ਕ੍ਰਿਸ਼ਨ 17 ਦਿਨ ਬੈਠੇ ਰਹੇ ਹਸਤਨਾਪੁਰ ਦਰਯੋਦਨ ਨੂੰ ਸਮਝਾਉਣ ਵਾਸਤੇ ਭਈ ਤੂੰ ਇਹਨਾਂ ਨੂੰ ਪੰਜ ਪਿੰਡ ਦੇ ਦੇ ਤੇ ਆਪਣਾ ਗੁਜ਼ਾਰਾ ਕਰ ਲੈਣਗੇ ਇਸ ਤਰ੍ਹਾਂ ਨਾ ਕਰ ਵਾਖੇ ਨਹੀਂ ਇਹ ਗੱਲ ਨਹੀਂ ਹੋ ਸਕਦੀ ਮੈਂ ਤੇ ਇੱਕ ਸੂਈ ਜਿੰਨੀ ਜਗ੍ਹਾ ਦੀ ਇਹਨਾਂ ਨੂੰ ਦਿੰਦਾ ਪਰਵਾਹ ਨਾ ਅੱਖਣ ਲੱਗਿਆ ਚਲਤੀ ਠੀਕ ਐ ਦਰਯੋਦਨ ਰਾਜ ਤੇਰਾ ਨਹੀਂ ਰਹਿਣਾ ਰਾਜ ਇਹਨਾਂ ਹੀ ਬਣਨਾ ਰਾਜ ਇਹਨਾਂ ਕੋਲ ਆ ਜਾਣਾ ਪਰ ਹੁਣ ਤੂੰ ਲੜਾਈ ਨਾਲ ਮੰਨੇਗਾ ਇਸ ਤਰ੍ਹਾਂ ਨਹੀਂ ਮੰਨੇ ਜਿੰਨਾ ਨੁਕਸਾਨ ਹੋਵੇਗਾ ਜਿੰਨਾ ਹੱਤਿਆ ਹੋਵੇਗੀ ਉਹ ਤੇਰੇ ਜੁਮੇ ਪਾਪ ਹੋਵੇਗਾ ਸਾਰਾ ਤੇ ਹੁਣ ਲੜਾਈ ਨਾਲ ਮੰਨੇਗਾ ਇਸ ਤਰ੍ਹਾਂ ਨਹੀਂ ਮੰਨੇ ਇਹਨਾਂ ਨੇ ਗੁਰੂ ਸਾਹਿਬਾਂ ਤੋਂ ਸਿੱਖਿਆ ਨਹੀਂ ਲਈ ਮੈਂ ਅਰਜ ਕਰ ਰਿਹਾ ਸਾਂ ਜੇ ਗੁਰੂ ਉਪਦੇਸ਼ ਹਿਰਦੇ ਚ ਨਾ ਵਸੇ ਤੇ ਸਮਝ ਲਓ ਬਾਸ ਬਿਰਤੀ ਬਾਸ ਹੈ ਬਿਲਕੁਲ ਪੂਲਾ ਇਹਦੇ ਅੰਦਰ ਅਸਰ ਨਹੀਂ ਹੋ ਸਕਦਾ ਐਸੇ ਮਨੁੱਖ ਦੇ ਮੈਂ ਅਰਜੇ ਕਰਨੀ ਆ ਅੱਜ ਕਬੀਰ ਕਹਿੰਦੇ ਨੇ ਕਬੀਰ ਗੁਰ ਲਾਗਾ ਤਬ ਜਾਣੀ ਐ ਮਿਟੇ ਮੋਹ ਤਨ ਤਾਪ ਹਰਖ ਸੋਗ ਦਜੈ ਨਹੀਂ ਤਬ ਹਰ ਆਪੇ ਆਪ ਜਿਹੜੇ ਮਨੁੱਖਾ ਨੇ ਗੁਰੂ ਉਪਦੇਸ਼ ਹਿਰਦੇ ਚ ਵਸਾ ਲਿਆ ਤੇ ਉਹਨਾਂ ਦੇ ਅੰਦਰੋਂ ਮੋਹ ਜਗਨੀ ਜਿਹੜੀ ਨਿਕਲ ਗਈ ਹੈ ਹੋਰ ਜਿਹੜਾ ਹਰ ਸ਼ਾਦੀ ਤੇ ਗਮੀ ਵਿੱਚ ਨਹੀਂ ਸੜਦੇ ਇਹਦੇ ਵਿੱਚ ਨਹੀਂ ਸੜਦੇ ਤੇ ਉੱਥੇ ਫਿਰ ਉਹਨਾਂ ਨੂੰ ਹਰ ਥਾਂ ਤੇ ਈਸ਼ਵਰ ਹੀ ਈਸ਼ਵਰ ਦੇਖ ਪੈਂਦਾ ਹਰ ਥਾਂ ਵਿੱਚੋਂ ਬ੍ਰਹਮ ਵੇਖ ਲੈਂਦੇ ਨੇ ਤੇ ਜੀਵਨ ਸਫਲ ਹੋ ਜਾਂਦਾ ਜਿਨ੍ਹਾਂ ਨੇ ਸਤਗੁਰਾਂ ਤੋਂ ਸਿੱਖਿਆ ਲਈ ਹੈ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ ਜਿਨ੍ਹਾਂ ਨੇ ਗੁਰੂ ਨਾਲ ਸਪਰਸ਼ ਕਰ ਲਿਆ ਇਹਦੇ ਕਈ ਅਰਥ ਨੇ ਮੈਂ ਅਰਜ ਕਰਾਂਗਾ ਇਹਦੇ ਉੱਤੇ ਮੈਂ ਇੱਕ ਦੋ ਇਤਿਹਾਸ ਵਿੱਚੋਂ ਅਰਜ ਕਰਾਂਗਾ ਆਪਦੇ ਸਾਹਮਣੇ